ਗੁਰੂ ਜੀ ਸਾਜੀ ਨਵਾਜੀ ਸਾਧ ਸੰਗਤ ਜੀ ਆਪਣੀ ਰਸਨਾ ਪੇਤਰ ਕਰਦੇ ਹੋਏ ਗੱਜ ਕੇ ਆਖੋ ਧੰਨ ਸ੍ਰੀ ਸਤਗੁਰੂ ਗ੍ਰਾਮ ਸਿੰਘ ਜੀ ਫਿਰ ਆਪਣੀ ਰਸਨਾ ਪੇਤਰ ਕਰੋ ਤੇ ਗੱਜ ਕੇ ਆਖੋ ਧੰਨ ਸ੍ਰੀ ਸਤਗੁਰੂ ਹਰੀ ਸਿੰਘ ਜੀ ਫਿਰ ਖੇਚਲ ਕਰੋ ਗੱਜ ਕੇ ਆਖੋ ਧੰਨ ਸਤਗੁਰੂ ਪ੍ਰਤਾਪ ਸਤਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵਕਤ ਸੰਬਾਧ ਹੋਇਆ ਇਸਨੇ ਬੜਾ ਹੰਕੇ ਹਨੇਰੀ ਤੇ ਮੀਹੀ ਤੇ ਪੱਥਰ ਛੁੱਟਿਆ ਤੇ ਹਜ਼ੂਰ ਦੇ ਚਰਨਾਂ ਵਿੱਚ ਜਿਸ ਵਕਤ ਆਇਆ ਸਾਡੇ ਸਿੱਖਾਂ ਤੇ ਨਹੀਂ ਚੱਲੇਗਾ ਤੋ ਕਹਿਣ ਤੂੰ ਬਾਹਰ ਹੈ ਇਹ ਸਤਗੁਰਾਂ ਨੇ ਬੜੀ ਕਿਰਪਾ ਕੀਤੀ ਸਾਧ ਸੰਤ ਨਬੀਸ਼ਾ ਅਨੁਸਾਰੇ ਤੇ ਦਰਸ਼ਨ ਦਿੱਤੇ ਰੇ ਹੁਣ ਵੀ ਗਰੀਬ ਲੋਕ ਕਰੋ ਵੀ ਤੋਂ ਹੁਣੇ ਥੋੜੀ ਦੇਰ ਤੱਕ ਦਰਸ਼ਨ ਦੇਵਾਂਗੇ ਆਪ ਜੀ ਦੇ ਸਾਹਮਣੇ ਭਾਈ ਹਾਰਾ ਰਹਿਲ ਖੰਡ ਦੇ ਵਿੱਚ ਰਹਿਣਾ ਪਠਾਣਾ ਦੀ ਤਹਿਤ ਦੇ ਵਿੱਚ ਆ ਗਿਆ ਹੈ ਹਜ਼ਾਰਾਂ ਰੱਬ ਨੇ ਫੜ ਕੇ ਆਪਣੀ ਕਾਦ ਵਿੱਚ ਪਾਏ ਹਾਰਾ ਜੀ ਗੁਰੂ ਨਾਨਕ ਦਾ ਸਾਧਕ ਇਹ ਵੀ ਅੱਜ ਕੈਂਦੀ ਬਣ ਕੇ ਉਸ ਕੈਦਖਾਨੇ 'ਚ ਪਹੁੰਚ ਗਿਆ ਦੁਖੀਆਂ ਜੀਵਨ ਨੂੰ ਦੇਖ ਕੇ ਗੁਰੂ ਤੇ ਸਿੱਖ ਦਾ ਜਿਹੜਾ ਦਿਲ ਹੈ ਉਹ ਡਰਵ ਜਾਂਦਾ ਹੈ ਸਤਿ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੋਈ ਕਹਿੰਦਾ ਏ ਸੁਨਾ ਗੁਰਦਾਜ਼ ਆਲਮਾ ਸੁਨਾ ਗੁਰਦਾਜ਼ ਆਲਮਾ ਬਖ ਦੇ ਲੋਕਾਂ ਦਾ ਬੰਦੇ ਲਾ ਦੇ ਲੈ ਹੋਰ ਕਰਨ ਸੁਪਾ ਵਾਸਨਾ ਕੋਈ ਕਰਦਾ ਵਾਸਨਾ ਕੋਈ ਚਲਦਾ ਦੰਦੇ ਹੋਈ ਕਿਆ ਐ ਪਿਰਦੁ ਪਛਾਣਾ ਆਪਣਾ ਆਕੇ ਕਰੋ ਉਰਾ ਤੁਹਾਰੀ ਬਜ਼ੋਰ ਜਲਦ ਜੁਤਾਨੇ ਅਰਜਨਾ ਮੇਰੀ ਹੋਰ ਦੁਖੀ ਜੀਵਾਨੂ ਨਾ ਰਹਿ ਲਿਆ ਦੀ ਬੰਦੀ ਦੇ ਜਪਿਆ ਕੈਦੀ ਬਣਾਇਆ ਦੇਖ ਕੇ ਭਾਈ ਹਾਰਾ ਨੇ ਗੁਰੂ ਨਾਨਕ ਦੇਵ ਜਰਨਾ ਵਿੱਚ ਅਰਦਾਸ ਕੀਤੀ ਅੰਦ ਕੀਤੀ ਮਿਰਖਾ ਕਦੇ ਨਾ ਹੋਵੀ ਜਨ ਕੀ ਅਰਦਾਸ ਆ ਚੌਦੀ ਪ੍ਰੀਤਮ ਮੇਰੇ ਗੋਵਿੰਦਾ ਹਰ ਪੱਬ ਮੇਰਾ ਚੋਦੀ ਜੀਓ ਭਾਈ ਗਦਾਸੀ ਵੀ ਇਸ ਤਾਨ ਕਰਦੇ ਨੇ ਕਹਿੰਦੇ ਨੇ ਬਾਪੇ ਦੇਖੀ ਧਿਆਨ ਯਾਦ ਇਸ ਸਾਧ ਰਤਬੀੰ ਦੇ ਸਈ ਬਾਜੋਂ ਗਵਾਰ ਹੈ ਹੈ ਹੈ ਕਰਦੀ ਸੁਣੀ ਲਕਾਈ ਬਾਬੇ ਦੇਖ ਬਣਾਇਆ ਉਦਾਸੀ ਕੀ ਰੀਤ ਤੇ ਕਰਤ ਲਕਾਈ ਅੱਜ ਹਜ਼ੂਰ ਨੇ ਨਿਰਾਲਾ ਭਾਈ ਮਰਦਾਨਾ ਬਾਲਾ ਨੂੰ ਦੋਹਾਂ ਨੂੰ ਸਾਥੀਆਂ ਨੂੰ ਕਿਹਾ ਭਾਈ ਕੁਛ ਥੜੀ ਦੇਰ ਵਾਸਤੇ ਤੁਹਾਨੂੰ ਨਾਲ ਨਹੀਂ ਜਾਣਾ ਫਿਰ ਤੁਹਾਨੂੰ ਯਾਦ ਕਰ ਲਾਂਗੇ ਸੱਜਣਾਂਗੇ ਹਜ਼ੂਰ ਅੱਜ ਰਹਿਲਖੰਡ ਦੇ ਸੰਨਰਿਆਂ ਬਣਾ ਦੇ ਵਿੱਚ ਜਿੱਥੇ ਬੜੇ ਧਾਨਕ ਜੰਗਲਾਂ ਦੇ ਵਿੱਚ ਇੱਕ ਸੋਹਣੀ ਬੀਤਨ ਚੜਦੀ ਜਵਾਨੀ ਹੈ ਸੂਰਜੋਦਨਾ ਆਪਣੀਆਂ ਕਿਰਨਾਂ ਛੱਡ ਰਿਹਾ ਹੈ ਸੂਰ ਚੌਂਕੜਾ ਮਾਰ ਨਿਤ ਕਰਮ ਸੀ ਕੋਹੜਿਆਂ ਤੇ ਚੜ ਕੇ ਜੰਗਲਾਂ ਦੇ ਵਿੱਚ ਚੱਕਰ ਲਾਉਂਦੇ ਰਹਿਣਾ ਅਸੀਂ ਕਹਿੰਦੇ ਆ ਇਹਦੇ ਬੜੇ-ਬੜੇ ਪਾਕਿਸਤਾਨ ਹਜ਼ੂਰ ਜੀ ਜਿਹਨੂੰ ਦਰਸ਼ਨ ਪ੍ਰਾਪਤ ਹੋਏ ਕਹਿੰਦਾ ਅੱਜ ਤਾਂ ਬਹੁਤ ਸਾਰੀ ਮਾਇਆ ਮੇਰੇ ਦੇਖ ਕੇ ਉਹ ਜਾਵਰ ਆਪਦੇ ਬੰਦੇ ਕਿਥੇ ਬੈਠੇ ਕਿਹੜੀ ਹਸਤੀ ਸੀ ਕਿ ਹਜ਼ੂਰ ਨੂੰ ਜਿਹੜੀ ਹੁਕਮ ਚ ਲੈ ਜਾ ਸਕਦੀ ਸੀ ਪਰ ਨਹੀਂ ਇਹਦੇ ਵਿੱਚ ਕਰਨਾ ਸੀ ਉਸ ਦੇ ਹੁਕਮ ਅਨਸਾਰ ਦੇ ਪਹੁੰਚਿਆ ਘਰ ਵਾਲੀ ਨੂੰ ਕੁਝ ਅੱਖਾਂ ਵਾਲੀ ਸੀ ਕਿਉਂਕਿ ਉਹ ਮਹਾਂਪੁਰਖਾਂ ਦਾ ਦਰਸ਼ਨ ਕਰਨ ਵਾਲੀ ਸੀ ਕਹਿਣ ਲੱਗੀ ਰਹਿਲੇ ਪਠਾਨ ਨੂੰ ਕਿ ਇਸ ਵਰਦੇ ਨੂੰ ਆਪਣੇ ਆਪਦੇ ਨੂੰ ਦੇ ਵੇਚੇ ਨਾ ਆਪਣਾ ਘਰ ਦਾ ਬੇੜਾ ਕਰਤਨਾ ਕਰਵਾ ਲਵੇਂ ਫਰਮਾਇਆ ਧਾਰੀ ਅਨਾਂ ਬੋਲਾ ਉਹਨੂੰ ਮਾਦਾ ਲਾਲ ਸੀ ਅੱਜ ਕਿੱਥੇ ਲਹਿ ਗਿਆ ਹਜੂਰ ਨੂੰ ਰੋਹਿਲ ਖੰਡ ਵਿੱਚ ਮੀਰ ਨਾਮੀ ਇੱਕ ਪਖਤਾਨਾ ਹੈ ਵੱਡਾ ਰਾਜਾ ਹੈ ਇਸ ਸ਼ਹਿਰ ਵਿੱਚ ਲਹਿ ਗਿਆ ਤੇ ਕਵੀ ਕਹਿੰਦਾ ਹੈ ਜੋ ਤੇ ਕੌਣ ਮਾਂ ਬਣਦਾ ਮੋਰ ਮਾਤਮਾ ਦਾ ਤੇ ਤੋਂ ਪਛਾਨ ਨੂੰ ਕੌਣ ਬਲਕਾਰ ਬਣੇ ਬਦੀ ਰਹੇ ਨਾ ਚੰਨ ਦੀ ਚੰਨੀ ਤੇ ਭਾਵੇਂ ਉਸ ਨੂੰ ਕੋਈ ਹਜ਼ਾਰ ਬਣੇ ਬੱਜਣ ਵਾਸਤੇ ਆਏ ਸੀ ਆਪੇ ਕੇ ਤੇ ਗੱਲ ਸਮਝਦਾ ਕੋਈ ਕਿਉਂ ਵਾਲਾ ਤੇ ਮਤ ਤੋਂ ਜੇ ਚਾਲ ਗੁਰਖਾਲਾ ਜੀ ਤੇ ਕਹਨ ਸੀ ਬੰਨ ਲੈ ਜਾ ਸਤਿ ਸ੍ਰੀ ਦੂਰ ਨੂੰ ਬਨ ਕੇ ਲਿਜਾਣ ਪਰ ਚੋਦੀ ਮੇਰੇ ਗੋਬਿੰਦਾਂ ਮੇਰਾ ਚੋਦੀ ਜੀਓ ਅੱਜ ਇਹਨਾਂ ਜੀਵਾਂ ਦਾ ਕਰਨਾ ਹੈ ਨਾ ਨੂੰ ਨਾਮ ਦਾਣ ਲਿਆ ਕੇ ਸ਼ਹਿਰ ਦੇ ਵਿੱਚ ਮੰਡੀ ਦੇ ਵਿੱਚ ਨਲਾਮੀਆਂ ਕਰਦੇ ਸੋ ਗੁਰੂ ਨਾਨਕ ਪਾਤਸ਼ਾਹ ਨੂੰ ਨਿਰੰਕਾਰੀ ਜੋਪੀ ਉਸ ਮੰਡੀ ਦੇ ਵਿੱਚ ਲਿਆ ਕੇ ਉੱਚੀ ਜਗ੍ਹਾ ਤੇ ਖੜਿਆ ਕਰ ਦਿੱਤਾ ਸ਼ਹਿਰ ਦੇ ਵਿੱਚ ਗੌਂਦੀ ਬਟਾਈ ਗਈ ਹੈ ਪਰ ਤੇ ਨੂੰ ਕਿਹੜਾ ਦੇਖਦਾ ਉਹ ਕਹਿੰਦਾ ਕਿ ਮੈਂ ਹੀ ਖਰੀਦ ਪਰ ਅੱਜ ਗਰੀਬਾਂ ਦੀ ਇੱਥੇ ਕੋਈ ਹਿੰਮਤ ਨਹੀਂ ਸਰਵਾਇਆ ਆਦਾਰਾਂ ਦੀ ਤੱਕਰ ਹੋ ਗਈ ਏ ਆਣ ਕੇ ਅਧੂਰ ਨੂੰ ਜਿਸ ਵੇਲੇ ਦੇਖਿਆ